ब्रह्म ज्ञानी निर्मलते निर्मल हो ब्रह्म ज्ञानी निर्मल से निर्मल हो कुछ आदमी अपने आप को निर्वर्ण पद से कहो दे सी निर्वर्ण पद कहो दे आदमी निर्वर्ण पद थी तो आनंद गुरु ने निर्वर्ण पद निर्वर्ण पद ने क्या नहीं राला बिल्कुल क्या ਇਹ ਬਿਵਲ ਹੁੰਦਾ ਨਾ ਬਿਵਲ ਹਮ ਇਹ ਹੈ ਬਰਤੋ ਰਹੇ ਫਿਰ ਮਲੀ ਇਹ ਬਿਵਲ ਆਉਣਾ ਦਿਲ ਦਾ ਫਿਰ ਜਿਹੜਾ ਬਲੀਨ ਹੋ ਜਵੇ ਪਹਿਲਾਂ ਬਲੀਨ ਸੀ ਉਹ ਨਰਮਾ ਹੋ ਜਾਂਦਾ ਹੈ ਬਲੀਨ ਦਾ ਕੀ ਆਪੀ ਇਹ ਬੰਦਾ ਮਦਦਾ ਨਾਲ ਲੱਗਦੀ ਹੋਈ ਜੀ ਜੈਸੇ ਮਹਿਲਣਾ ਲੱਗਦਾ ਜਲਾ ਜਲਾ ਇਹ ਅੰਦਰ ਅਗ ਨੂੰ ਮੈ ਲੱਗਦੀ ਹੋਈ ਜਲੂ ਦਾ ਲੱਗ ਜਾਂਦੀ ਹੈ ਜਲਾ ਪਾਣੀ ਨੂੰ ਲੱਗਦੀ ਹੈ ਜਲਾ ਹੈ ਲਾਗ ਜਲਦੀ ਹੈ ਜਲਾਉਣ ਵਾਲੀ ਚੀਜ਼ ਆ ਗਰ ਇਹੋ ਨਹੀਂ ਲੱਗਦੀ ब्रह्म ज्ञानी के मन हुए प्रगासो जैसे तारो पर आदा जल जाती है ना जल सड़ जाती है वो बदबू नहीं वो नहीं पर वो बिचारा दुवानगर वाला बेचारा ओय ਜੋ ਜાળਗੀ ਨਾ ਕੋਈ ਕੁਛ ਸਭ ਉਤਾਲ ਜਾ ਵੀ ਅਗਰਵਤੀ ਹੈ ਜੇ ਇਹ ਪੂਰੀ ਨੂੰ ਪੂਰੀ ਅੰਦਰ ਲਾ ਕੇ ਭੂਗਣਾ ਮਰਦਾ ਉਹ ਸੈਟ ਹੋਣਾ ਨਾ ਹੋਗਾ ਦੋ ਅੱਗ ਅਗਰਵਤੀ ਥੋੜੂ ਫਿਰੋ ਜੀ ਜੀ ਮੜੀ ਗੜੀ ਧੂਆਂ ਜਰਾ ਜੱਲਦੀ ਲੈ ਤੂੰ ਅਜੋ ਉਹ ਭਾਵੇਂ ਥੋੜੀ ਠੀਕ ਹੋ ਤੋ ਫੇਰ ਖੂਗ ਸੱਚੇ ਜਾਂ ਵੀ ਦਾ ਉਹਦੇ ਨਾਲ ਸਾਨੂੰ ਜਿਆਦਾ ਨਹੀਂ ਕੋਈ ਦਬਰੇ ਤੇ ਪਾਣੀ ਕਰਦੇ ਇਹਨਾਂ ਨੇ ਹਾਂ ਹਾਂ ਵੇ ਦੇਖਣਾ ਇਹ ਜਲ ਨੂੰ ਸਭ ਕਰਨਾ ਵੀ ਜਲ ਹੈ ਜਲ ਹੈ ਜਲ ਜਲ ਤਾਂ ਪੈਦਾ ਹੋ ਜਾਂਦਾ ਹੈ ਪਾਣੀ ਮੈਲਾ ਗਿਆ ਪਾਣੀ ਮੈਲਾ ਸਾਰੀ ਮੈਲੇ ਪਾਣੀ ਚ ਨਿਕਲੀ ਆ ਸੀ ਔਰ ਫੜੇ ਤੇ ਧੋਈ ਗਿਆ ਉਹ ਪਾਣੀ ਜੋ ਮਿੱਟੀ ਸਾਰੀ ਪਾਣੀ ਚ ਨਿਕਲੀ ਆ ਜਿੰਨਾ ਵੀ ਕੋਸ਼ ਹੈ ਹੱਡੀਆਂ ਰਕਤ ਜੋ ਵੀ ਚਰਬੀ ਜੋ ਵੀ ਕੋਈ ਸੱਤ ਸਾਤ ਜਿੰਦਾ ਦਾ ਨਾਮ ਨਹੀਂ ਪਾਣੀ ਉਹਦਾ ਬਾਤ ਦੇ ਵਿੱਚ ਸਭ ਕੋ ਬਣ ਜਿਵੇਂ ਬਣ ਕੇ ਪਿੰਨਾ ਨਿਕਲਦਾ ਉਹਦਾ ਨਾਲੇ ਸਭ ਕੁਝ ਜਲ ਹੀ ਹੈ ਜਲ ਬਿਨ ਕਿਛ ਨਾ ਹੈ ਨੇ ਫਿਰ ਉਹ ਬਣੀ ਪਾਣੀ ਐ ਪਾਣੀ ਮਿੱਟੀ ਹੁਦੀ ਹੋਈ ਐ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਧਰੁਪਰਾਸ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਬਸ ਜਿਹੜਾ ਹੁੰਦਾ ਹੈ ਉਦੇ ਮਨ ਵਿੱਚ ਇੱਕਾ ਚਰਨ ਹੋ ਜਾਂਦਾ ਹੈ ਮਨ ਵਿੱਚ ਨਹੀਂ ਰਹਿਦਾ ਲੋਕ ਬੰਤ ਸਦਨ ਨਹੀਂ ਰਹਿਦੇ ਰਾ ਇਹਦਾ ਨਾ ਇਹ ਰੂ ਹੈ ਤਾਂ ਕਿਹਦੇ ਰੂ ਹੈ ਨੇ ਤੇ ਜਿਹੜੂ ਨੋਰ ਕਹਦੇ ਨੇ ਅੱਜ ਨਾਲ ਉਹ ਸਾਥ ਕਹਿੰਦਾ ਵੀ ਇਹ ਤਾਂ ਬੇਅਕਲ ਹੈ ਇਹ ਜਿਹੜਾ ਉਹ ਜਿਹਨੂੰ ਗਿਆਨ ਕੱਟ ਗਿਆ ਹੋਵੇ ਉਹਨੇ ਰੂ ਗਾਇਸ ਦੇ ਉਹ ਕੁਰਬਾਨੀ ਨੇ ਉਹਨੂੰ ਅੰਨਾ ਕਹਿਤਾ ਕਿ ਉਹਦੇ ਅੰਦਰ ਦੀ ਬੁੱਧੀ ਆਲੀ ਖੁੱਲੀ ਨਹੀਂ ਹੋਈ ਬੰਦ ਕੀਤੀ ਹੋਈ ਜੁੱਤਾ ਹੋਇਆ ਉਹ ਸੁੱਤਾ ਹੋਇਆ ਕਰਕੇ ਅੰਨਾ ਕਹਿਆ ਹੋਇਆ ਉਹ ਸੁੱਤਾ ਹੋਇਆ ਸੁੱਤਾ ਕਹਵਾਂ ਨੇ ਥੋੜੀ ਜਿਹੀ ਗੱਡਬੀ ਆ ਜਾਂਦੀ ਹੈ ਸੁਤੇ ਤੇ ਆਨੇ ਗਈਆਂ ਤੇ ਉਹ ਵੀ ਆਈ ਹੋਈ ਹੈ ਉਹ ਸੂਤਕਾ ਥੋੜਾ ਸੂਤਕਾ ਹੋਈ ਜਾਓ ਆਓ ਜੇ ਮੜਾ ਮੋਟਾ ਜਾਗੂ ਹੀ ਪੈਂਦਾ ਉਹ ਅੱਖਾਂ ਹੀ ਖੁੱਲ ਹੀ ਜਾਂਦੀ ਜਿੰਨਾ ਜਰ ਸੂਤਰੀ ਨੇ ਇਹਦਾ ਨਹੀਂ ਕਰਦਾ ਜਾ ਕੇ ਵੀ ਜਾਗ ਜੱਤੇ ਗਈ ਤੁਮ ਸੁਣ ਕੇ ਗੱਲਾਂ ਪਰ ਸੂਤ ਤੇ ਵਿਗੜਦੇ ਨਾ ਖੁੱਲਣੇ ਹਾਂਜੀ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਤਾਰੂ ਪ੍ਰਗਾਸ ਰੱਬਿਆ ਮਨ ਇੰਨਾ ਪ੍ਰਗਾਸ ਹੁੰਦਾ ਜਦੋਂ ਧਰਤੀ ਤੇ ਆਕਾਸ਼ ਹੂੰ ਤਕਰੀਬਨ ਆ ਜਿਹੜਾ ਤਤ ਨੇ ਜਦੋਂ ਤਾਂ ਦਾ ਗਿਆਨ ਆਇਆ ਆ ਗਿਆ ਬਾਕੀ ਥੱਲੇ ਹੈ ਸਭ ਕੁਝ ਤਾਂ ਤਾਂ ਕਿ ਬਣਿਆ ਆ ਸਭ ਕੁਝ ਇਹ ਜਵਾਲੱਖੇ ਨੇ ਉੱਤੇ ਜਾ ਕੇ ਬਾਕੀ ਉਹਨੇ ਕਰਨਾ ਹੈ ਕੋਈ ਚੀਜ਼ ਆਵਾਜ਼ੀ ਬਾਸ ਤੇ ਨਾ ਗਿਆ ਕਿ ਤਹਾਨੂੰ ਆ ਗਿਆ ਹੈ ਚਲੋ ਆਮੋ ਜਿਹੜੀ ਖੋਜ ਕਰਦੇ ਨੇ ਗੁਰਬਾਣੀ ਤੋਂ ਹੋਈ ਪਈ ਹੋਈ ਇਹ ਤਾਂ ਕਰੀ ਜਾਂਦੇ ਨੇ ਸੋ ਦੇਖਦੇ ਨੇ ਇਹ ਗੁਰਬਾਣੀ ਜਿਹੜੀ ਗੱਲਾਂ ਕਹਦੀ ਹੈ ਉਹਦੇ ਦਾਸੀ ਲਵੇ ਦੇ ਵਿੱਚ ਪਹੁੰਚੇ ਜੀ ਭ੍ਰਮ ਗਿਆਨੀ ਕੇ ਮਿੱਤਰ ਸੱਤਰ ਸੁਆਨ ਭ੍ਰਮ ਗਿਆਨੀ ਕੇ ਨਹੀਂ ਹੋਵਾਂ ਭ੍ਰਮ ਗਿਆਨੀ ਕੇ ਮੱਤਰ ਸੱਤਰ ਸੁਆਨ ਸ਼ਤਰੂਆਂ ਦਾ ਬਿੱਤਰ ਸਮਾਨ ਹੋ ਜਾਂਦਾ ਹੈ ਪਰਮ ਗਿਆਨ ਦੇ ਵਾਸਤੇ ਤਾਂ ਉਹ ਜੱਤ ਬੈਰੀਆ ਨਾ ਬਗਾਨਾ ਰਹਿਣਾ ਹੁੰਦਾ ਹੈ ਜੇ ਰਮਾ ਸ਼ਤਰੂਆਂ ਨਾਲ ਹੰਤਰਾ ਸਮੂਹਤਾ ਬਦਲ ਵੇਹੇ ਜੇ ਕੋਈ ਸ਼ਤਰੂ ਹੈ ਵੀ ਮਿੱਤਰ ਹੈ ਵੀ ਦੁਨੀਆਵੀ ਲੈਵਲ ਤੇ ਲੋਕਾਂ ਨੂੰ ਲੱਗਦਾ ਤਾਂ ਉਹ ਤੋਂ ਅਸੀਂ ਕੁਝ ਨਹੀਂ ਉਹਦਾ ਬਣਾਏ ਕੁਝ ਨਹੀਂ ਮਿੱਤਰ ਕਦੇ ਮਨ ਨਹੀਂ ਜਾਵੇ ਸ਼ਤਰੂ ਸ਼ਤਰੂ ਚੱਲ ਮਿੱਤਰ ਤਾਂ ਬੁੱਤਰ ਬੁੱਧਾਈ ਹੁੰਦਾ ਨਹੀਂ ਚੱਲਦਾ ਕੋਈ ਰੌਣਾ ਨਹੀਂ ਸੱਤਾ ਸ਼ਤਰੂ ਦੀ ਉਹਦਾ ਕੋਈ ਸ਼ਤਰੂ ਮਿੱਤਰ ਹੁੰਦਾ ਨਹੀਂ ਹੋਰ ਕਰਕੇ ਕੋਈ ਨਹੀਂ ਹੱਸਦਾ ਕੋਈ ਸ਼ਤਰੂ ਕਹੇ ਕੋ ਪ੍ਰਾਰਥਨਾ ਕਰੇ ਸੋਚੇ ਸਕਦਾ ਚੁਸੀ ਜਾਵੇ ਅਜੀ ਉਹਦਾ ਲਗਨ ਤੇ ਨੂੰ ਸੋਚੀਏ ਜਾਵੇ ਸਤਿ ਤਾ ਅਸੀਂ ਕਰਾਂਗੇ ਸ਼ਤਰੂ ਤਾਂ ਸਾਡੀ ਰੂਹ ਜਿਹੜੀ ਹੈ ਉਨੇ ਘੋਲ ਕਰਦੀ ਬਹੁਤ ਥਰਮ ਲਾਈਟ ਤਾਂ ਜਿੱਤਰ ਤਾਂ ਹੋ ਗਈ ਜੇ ਤੁਸੀਂ ਕਿ ਕਿਸੇ ਤੋਂ ਉਪੀ ਉਦੀ ਫਾਰ ਨਹੀਂ ਤਾਂ ਤਾਂ ਹੋ ਨਹੀਂ ਸਕਦਾ ਹੋਰ ਬਾਣੀ ਤਾਂ ਉਹ ਪਊਗਾ ਜਿੱਥੋਂ ਤੱਕ ਹਮ ਹੂਰਣਾ ਬਹੁਤ ਸੱਚੇ ਸਥੋਂ ਦਾ ਕਲਪਾਤ ਹੋੜ ਬਣਦੀ ਆ ਗਈ ਜਿੱਥੋਂ ਕਰਦਾ ਇਹ ਖੋੜਰੋਂ ਨਹੀਂ ਹਰਵਾਲ ਵੇ ਖੋੜਰੋਂ ਹੁਣ ਤੇ ਉਹ ਆਪਣਾ ਸਭ ਕੁਝ ਛੱਟਦਾ ਇਹ ਖੋੜਰੋਂ ਤਾਂ ਇਲੀਗਲ ਬਣ ਰਹੀ ਖੋੜਰੋਂ ਆ ਇਹਨਾਂ ਨਾਲ ਇਹ ਕਿ ਮੇਲ ਨਹੀਂ ਕਰਨਾ ਇਹਨੂੰ ਸ਼ਤਰੂ ਤੋਂ ਨਾਲ ਨਹੀਂ ਕਿਹਾ ਹਾਂ ਇਹਹੀ ਕਿ ਇਹਨੂੰ ਮੇਲ ਨਹੀਂ ਕਰਨਾ ਮੇਲ ਹੀ ਕਰਨਾ ਬਸ ਸ਼ਤੂ ਮੇਲ ਨਾਲ ਕਰਨ ਦਾ ਕੀ ਭਾਅ ਹੁੰਦਾ ਜੀ ਵਿੱਚ ਕੋਈ ਜੇ ਮੈਂ ਪਾਤਨ ਤਸੰਬਾਸ਼ਾ ਸਾਰੇ ਹੀ ਬਾਈ ਘਰ ਹੀ ਭੁਜਾ ਦਿੱਤੇ ਤੇ ਆ ਕੇ ਉਹ ਆਉਂਦਾ ਆ ਵੀ ਤਾਂ ਵਾਲੇ ਆਇਆ ਸੀ ਪੱਲੇ ਪਾਸੇ ਰਾਮ ਰਾਧੀ ਦੇ ਪਾਸੇ ਲੈ ਕੇ ਗਿਆ ਸੀ ਨਾਨ ਵਾਲਾ ਰਾਜਾ ਨਾ ਉਹ ਨਖਲੇ ਗੁਰੂ ਘਰ ਅਸਲੀ ਗੁਰੂ ਘਰ ਲੋ ਭਾਜੀ ਸੀ ਗੁਰੂ ਘਰ ਉਹ ਦੋ ਖੜਾ ਸੀ ਰਾਮ ਔਰ ਰਾਣਾ ਗਿਆ ਜੀ ਉਹ ਮਹਾਰਾਜ ਜੀ ਉਹ ਗੁਰੂ ਆ ਹਾਂ ਵੀ ਲੋਕਾਂ ਦੇ ਪ੍ਰਭਾਵ ਅਸਲੀ ਨਾਨਕ ਪਰ ਉਹਨਾ ਨੇ ਆਪਾਂ ਅਨਸਾਉਂਦੇ ਲੜਾਈ ਜਿੱਤ ਕੇ ਵੀ ਕੋਈ ਨਹੀਂ ਕਿਹਾ ਜਾ ਕੇ ਰਾਮ ਰੇਣ ਅਲੱਗ ਉਹ ਕਹਿੰਦੇ ਸੀ ਤੁਰ ਜਾਗਰਾਂ ਨੇ ਕਿਹਾ ਆਪਣਾ ਜਾ ਕੇ ਜੋ ਆਪਣੇ ਹਮਾਂ ਦਾਸ ਹੋਵੇ ਕੱਲਾ ਹੀ ਤੇ ਉਹ ਡਰ ਗਿਆ ਜੀ ਉਹ ਗੱਲ ਉਹਨਾਂ ਨੇ ਨਾ ਕੀਤਾ ਚਲੋ ਕਾਨੂੰ ਦਸ ਪਾਸ਼ਾ ਨੇ ਜਦ ਬਣਾਇਆ ਜਾ ਕੇ ਪੋੜਾ ਸਾਹਿਬ ਉਹ ਜ਼ਾਲਤਾ ਦਾ ਹੈਗਾ ਤੇਰਾ ਦੂਜਾ ਪੋੜਾ ਸਾਹਿਬ ਪੋੜਾ ਨਵੀਂ ਕਿਹਨਾਂ ਹੈ ਜਿਲ੍ਹਾ ਬਣਾਇਆ ਸੀ ਦਸ ਪਾਸ਼ਾ ਦੇ ਉੱਤੇ ਹੋਰ ਹੈ ਜਿਹੜੇ ਜੇ ਕੀਤੀ ਹੈ ਜਿਹੜੇ ਰਹੇ ਸੀ ਉਹ ਮ ਹੋਂਦੋਂ ਇਹ ਜਗਾਉਂਦੇ। ਉਹ ਕਿਲੇ ਤੇਲੇ ਦਵਾ ਸੀਓ। ਕਿਨਾਂ ਨਮਾ ਗੁਰਦਾਈ ਤੇ 4 4 ਜਿਵੇਂ ਵਧ ਰਹਾ ਤੇਲੇ ਸੀਓ ਵਿੱਚ ਦਵਾ ਸੀ ਕਿਲਾ ਸੀ ਗੇਟ ਸੀ ਸੀ ਨੀ ਉਸ। ਪਿੱਛੇ ਪਾਸੇ ਪਹਾੜੀ ਹੈ ਨਾ। ਹਾਂਜੀ। ਬ੍ਰਹਮ ਗਿਆਨੀ ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ। ਦੁਨੀਆਂ ਦੀ ਹੁੰਦਾ ब्रह्म ज्ञानी की ऊंचदे ऊँचा बस कहानी ये को ऊँचा अपना को मानता है संसार च कोई गुरु बंधा अपने आप नु पहुंचा अगो राजा ਉਥੇ ਨਾ ਬਰੁਖਿਆ ਨਹੀਂ ਆਇਆ ਨਾ ਸਤਗੁਰਾ ਆਇਆ ਉਥੇ ਲੱਭ ਨਹੀਂ ਆਏ ਕੱਲਾ ਬਸ ਭਗਤਾਂ ਗਿਆ ਨਾ ਭਗਤ ਥੋੜਾ ਬਰੁਖਿਆ ਦੀ ਉੱਚੀ ਵਿਵਸਥਾ ਦਾ ਨਾ ਹੈ ਬਰੁਖਿਆ ਇੱਜ਼ਤ ਵਾਲਾ ਰਹਦਾ ਭਗਤ ਇੱਜ਼ਤ ਵਾਲਾ ਨਹੀਂ ਹੈ ਅਗਦਾ ਕੋਈ ਗੁਰੂ ਹੈ ਭਗਤ ਕੋਈ ਉੱਪਰ ਹੈ ਭਗਤ ਤਾਂ ਦਾਸदाई ਦੂਰ ਨੋ ਵੜਕੇ ਅ ਅ ਜਰ ਖਰੀਦ ਗੁਲਾਮ ਦਾ ਨਾਮ ਭਵਦਾ ਇੱਥੇ ਆਏ ਨਾ ਬ੍ਰਹਮ ਕਹਿੰਦੀ ਆਪੋ ਮੇਸ਼ਰਾਂ ਦੇ ਨੂੰ ਭਗਤ ਬਰਾਬਰ ਹੋਣਾ ਬ੍ਰਹਮ ਕਹਿੰਦੀ ਉੱਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਪਰਮਿਆਨੀ ਉੱਚਾ ਉੱਚਾ ਠੀਕ ਹੈ ਪਰਮਿਆਨੀ ਪਿੱਛੇ ਆਉਂਦਾ ਚੱਲੇ ਆ ਲੱਭੂ ਹੁੰਦਾ ਹੈ ਪਿੱਛੇ ਕਹਿੰਦੇ ਠੀਕ ਆ ਪਰ ਉਹ ਗਿਆਨੀ ਉੱਚਾ ਉੱਚਾ ਹੁੰਦਾ ਹੈ ਮਨ ਆਪਣੇ ਤੇ ਨਹੀਂ ਕੋਣ ਹੁੰਦਾ ਉਹਨੂੰ ਇਹ ਆ ਤੂ ਉਹ ਜਿਹੜਾ ਗਿਆਨੀ ਜਿਹਨਾਂ ਦੇ ਇਹ ਤੇ ਬਰਾਬਰ ਅੰਡੇ ਰਾਜ ਕੋਲ ਦਾ ਬਟਾ ਰਾਜ ਇਹਨਾਂ ਚ ਬ੍ਰਾਹਮਣ ਦਾ ਬਟਾ ਉਹ ਹੈ ਇਹਨਾਂ ਦਾ ਉਹ ਵਿਚਾਰ ਨੂੰ ਮੈਂ ਚਾਹੇ ਉਹ ਸਦਨਾ ਕਥਾਈ ਵੀ ਹੋਵੇ ਚਾਹੇ ਜਮਾਦ ਵੀ ਹੋਵੇ ਆ ਗਲਤ ਹੈ ਇਹ ਉਹਦੀ ਯਾਦ ਨਹੀਂ ਹੁੰਦੀ ਕੋਈ ਫਿਰ ਉਹ ਗਿਆਨੀ ਆ ਉੱਚਾ ਉੱਚਾ ਬਸ ਚਾਹੇ ਉਹ ਬ੍ਰਾਹਮਣਾਂ ਜੋ ਬ੍ਰਹਮੇ ਅਧਿਆਨ ਕਰਦੇ ਹੋਵੇ। ਸਾਮੀ ਹੋਈ ਹੈ। ਚਾਹੇ ਉਹ ਖੱਤਰੀਆਂ ਜੋ ਹੈ। ਚਾਹੇ ਉਹ ਛੂਤਰਾ ਜੋ ਹੈ। ਚਾਹੇ ਉਹ ਬੈਸੋ ਜੋ ਹੈ ਉਹ ਇਕੋ ਲਈ। ਕੋਈ ਨਹੀਂ ਕੋਈ ਫਰਕ ਹੈ। ਹੋਰ ਕੋਈ ਜਿਹੜੇ ਬੜੇ ਛੋਟੇ ਨੇ ਇਹ ਆਪਣਾ ਹੋਰ ਇਹਨਾਂ ਦਾ ਸਾਰਾ ਦੁਨਿਆਵੀ ਹੈ। ਕੋਈ ਰਾਜਾ ਭਾਈ ਮਾਲਦਾਰ ਹੈ। ਕਿਸੇ ਕੋ ਸੰਸਾਰੀ ਗਿਆਨ ਹੈ। ਕੋਈ ਬੈਦਹ ਹੈ ਕੋਈ ਕੁਛ ਹੈ ਉਹ ਗੱਲ ਹੋਰ ਹੈ। ਮਨ ਆਪਣੇ ਹੈ ਸਭ ਤੋਂ ਤੋਂ ਨੀਚਾ ਪਰ ਉਹ ਆਪ ਆਪਣੇ ਮਨ ਕਰਕੇ ਵੀ ਉੱਚਾ ਹੈਗਾ ਮੁੱਦਾ ਸਕਦੇ ਵੀ ਮੈਂ ਉੱਚਾ ਕਹਾ ਦੇਖਾਉਂ ਮਾਤੀ ਉਹਦਾ ਬੰਦਾ ਇਸ ਗੱਲ ਨੂੰ ਵੀ ਮੈਂ ਉੱਚਾ ਕਿ ਮੈਂ ਸਾਡਾ ਮੰਨੀ ਨਾ ਮੰਨਦਾ ਮਾਇਆ ਝੱਡਣ ਨੂੰ ਇਹ ਮੈਂ ਉਹਦਾ ਮਨ ਇੱਦਾਂ ਨਹੀਂ ਮੰਨਦਾ ਹੈ ਵੀ ਹਾਂ ਵਿਚੋਂ ਕੋਈ ਟਹਿਦਾ ਵਿਚਾਇਆ ਉਹ ਦਾ ਇਥਾਂ ਵਿਰੋਧ ਕਰੂਗਾ ਜਦੋਂ ਅਸੀਂ ਬਹੁਤ ਬੜੇ ਬੜੇ ਔਗੜਾਂ ਦਾ ਵਿਰੋਧ ਕਰਦੇ ਹਾਂ ਸਮਝੂ ਚੰਨਨ ਉਹ ਹੈ ਹੈ ਸਮਝੂ ਨਹੀਂ ਹੈ ਔਗਣ ਹੈ ਉਸ ਆਪਰ ਕੋ ਜੋ ਜਾਣ ਉੱਤਰ ਬੱਥਰਮ ਕਹਿੰਦੀ ਆ ਤਾਂ ਹੱਬ ਤੇ ਨਹੀਂ ਚੜਿਆ ਜਾਣ ਪਤਾ ਖਾੜੇ ਚ ਦੇਊਗਾ ਕੋ ਚੜਾਈ ਐ ਇਧਰ ਦੇਊਗਾ ਜੇ ਸਰਪਰ ਨਾ ਆ ਜਿੰਨੀਆਂ ਨੇ ਇਸ ਅਵਸਥਾ ਜੀ ਬਣੀਆਂ ਨੇ ਸਭ ਤੋਂ ਉੱਚਾ ਬਣ ਕੇ ਸਭ ਤੋਂ ਥਿੱਚੇ ਚਲੇ ਗਏ ਆਈਏ ਬਸ ਮੱਤਾ ਘੜੀਆਂ ਕਰ ਗਿਆ ਨੇ ਇਹਨੂੰ ਕਰੀਆਂ ਉੱਚਾ ਸਮਝਣ ਵਾਲਿਆ ਵੀ ਘੜੀਆਂ ਦਿੱਤੀਆਂ ਹੋਰ ਕਰ ਤੇ ਹੁਣ ਤਰਹ ਦੇਖੋ ਨਾ ਇਹ ਚਲੇ ਕਾਇ ਬੈਠੇ ਫਾਇਲਾਈਟ ਕਰ ਬੈਠੇ ਵਾਹਪੁਰ ਉਹ ਖੇਤਰ ਨਾਲ ਜੁੜਦਾ ਕੋਈ ਨਹੀਂ ਪਰਦਾ ਚੱਕ ਗੁਰਵਾੜੀ ਦਾ ਪਰਦਾ ਚੱਕਦਾ ਕੋਈ ਵਾਹ ਕੋਈ ਨਹੀਂ ਉਹ ਤੜਫਦੇ ਰਹਿੰਦੇ। ਜਿਸੀ ਕਰੀਏ ਤਾਂ ਕੀ ਕਰੀਏ। ਜੜੀ ਤਾਂ ਕਹਿੰਦੇ ਤੁਹਾਨੂੰ ਕਿਹਨਾਂ ਕਿਹਾ ਸੀ ਤੋ। ਕੋਈ ਸਿੱਖੋਂ। ਉਹ ਦੇਖਦੇ ਗੁਰਬਾਨੀ ਕੀ ਕਹਿੰਦੀ ਹੈ। ਉਹ ਤਾਂ ਗੁਰਬਾਨੇ ਦੇ ਉਲਟ ਖੜੇ ਹੋ ਜਿਹੜਾ ਉਲਟ ਖੜਾ ਹੋਊਗਾ। ਅਜੋ ਵੀ ਤੁਸੀਂ ਉਲਟੇ ਖੜੇ ਆ। ਅਦਰੋ। ਸਾਡੇ ਜੀ ਮਹਾਂਪੁਰ। ਤੁਸੀਂ ਤਾਂ ਕੁਰਬਾਨੀ ਤੇ ਉਹ ਟ ਖੜਿਆ ਹਾਂ ਥੋੜੀ ਅਸੀਂ ਪ੍ਰਵਾਹੀ ਕਰੀਏ ਕਿਵੇਂ ਤੁਹਾਨੂੰ ਅਸੀਂ ਸਿੱਖ ਬੋਲੀ ਬ੍ਰੋਹਨ ਕਰ ਰਹਾ ਹਾਂ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਹਾਂ ਪ੍ਰਭ ਗਿਆਨੀ ਸੇ ਜਨ ਭਏ ਬ੍ਰਹਮ ਗਿਆਨੀ ਉਹ ਆਦਮੀ ਬਣ ਗਏ ਨਾਨਕ ਜਿੰਨ ਪ੍ਰੋਬਲਮ ਆਪ ਕਰੇ ਇਹਨੂੰ ਪ੍ਰੋਬਲਮ ਹੈ ਆਪ ਉਹ ਤੇ ਪੜਾਈ ਉਹਨੇ ਆਪ ਕਰਾਉਣੀ ਹੈ ਓਏ ਉਹ ਬਲਾਊਗਾ ਤਾਂ ਬੋਲੋਗੇ ਪਰ ਆਪ ਕਰੇ ਕੀ ਹੈ ਜਦ ਪੈਦੀ ਕੋ 4 ਬਜ਼ਾਰ ਤੋਂ ਦੇਣ ਦਾ ਮਤਲਬ ਹੈ ਦੋ ਬਜ਼ਾਰ ਤੋਂ ਤੋਂ ਬਿਨਾ ਮਿਲੇ ਨਹੀਂ ਸਕਦੇ ਫਿਰ ਦੋਏ ਨੇ ਦੋ ਬਜ਼ਾਰ ਤੁਸੀਂ ਕਿਸੇ ਤਰ੍ਹਾਂ ਤੋਂ ਰਹਿਣੋ ਸਾਡੇ ਕੋਈ ਉਹ ਤਾਂ ਜਿਆਦੇ ਨਹੀਂ ਹੈ ਜੋ ਸੰਸਾਰ ਸੂਡਾ ਹੈ ਇਹ ਗੱਲਾਂ ਮੰਨੀ ਜਾਵੇ ਸਤੋਕੀ ਤਾਂ ਵੇਹਾਨਾ ਤੇ ਸਾਡੀਆਂ ਗੱਲਾਂ ਨਿਕੜਾ ਕੋਈ ਨਾਲ ਲੈ ਜਾਣਾ ਮੰਨ ਲੋ ਇੱਥੇ ਤਾਂ ਕਦਾ ਕੋਈ ਕੋ ਦਾ ਔਖਾ ਨਹੀਂ ਆਇਆ ਕਰਤਾ ਸੇ ਜਾਵੇ ਜਿਵੇਂ ਉਹ ਤੋਂ ਬ੍ਰਹਮ ਗਿਆਨੀ ਸਗਲ ਕੀ ਰੀਣਾ ਗਿਆਨੀ ਚੀਨ ਆਵਾਜ਼ ਮੈਨੂੰ ਇਹ ਦੋ ਬਦਾਰਸੀਆਂ ਲੱਗਦੇ ਨੇ ਬਾਅਦ ਦੇ ਇਹਦਾ ਗਲਤੀ ਹੈ ਪਾਣੀ ਟੁੱਟ ਗਿਆ ਨਹੀਂ ਉਹ ਦਬ ਚਲਾ ਗਿਆ ਬੱਟ ਟੁੱਟ ਕੇ ਉਹ ਤਾਂ ਬੰਨ ਫਟਿਆ ਹੀ ਨਹੀਂ ਸੀ ਉਹ ਪਿੱਛੋਂ ਦਾ ਬੰਨ ਕੇ ਲਿਆਂਦਾ ਸੀ ਤਾਂ ਜਦ ਉਹਨੂੰ ਸੀ ਪਹਿਲਾਂ ਟੁੱਟਿਆ ਹੋਇਆ ਸੀ ਉਹਨਾਂ ਨੇ ਪੜਤਾ ਅਮਾ ਜਾਨ ਨੂੰ ਦਮਾ ਗਿਆ ਹੁਣ ਇਹਨੂੰ ਹੁਣ ਨਹੀਂ ਉਹ ਜਿਹੜਾ ਸੀ ਉਹ ਬਹੌਰ ਠੀਕ ਕੀਤਾ ਸਭੇ ਬੁੱਢੀ ਜਾਂਦੀਆਂ ਇੱਕ ਰਹਿ ਤੱਤ ਗਿਆਨ ਫੇਰ ਉਹ ਜਿਹੜਾ ਪੰਡ ਟੁੱਟਿਆ ਤਾਂ ਠੀਕ ਕਰਕੇ ਦਿੱਤਾ ਫੇਰ ਬਾਲਗੁੱਤ ਕਰਕੇ ਭੇਜੀ ਫਿਰ ਇੱਥੇ ਆ ਗਿਆ ਸੰਦ ਦੇ ਵਿੱਚ ਫੇਰ ਉਹ ਜਾਈ ਉਹ ਤੋੜਦਾ ਉਹ ਬੰਨੇ ਰੌਣਾਦਵਾਰਾ ਤਾਂ ਹੁਣ ਜਿਹਨੂੰ ਪ੍ਰੀਤ ਕਹਿੰਦਾ ਵੀ ਬੰਨ ਦਰਿਆ ਦਾ ਬੰਨ ਹੈ ਸ੍ਰੀ ਸ਼ਾਨੂ ਰੌਣਾ ਦਰਿਆ ਨੂੰ ਰਾਂ हां तो ट्रंप फील्ड है बाहर और भावना टूट जबे ते फेर इनको कहा गया ना पूरे अतिमार्दा इननु आगे संस्थावन पैसा पैसा मारदा तरुण तो न बना ओहो गुर्जारे क्यों फैल होए ना माया करके गोल करके झगड़ा करा दे गोल करके ਇਹ ਬੱਤ ਤੋੜਦਾ ਮਾਇਆ ਨੇ ਸਾਥ ਸਰਦਾਈ ਸੀ ਮਾਇਆ ਤੇ ਤੁਹਾਡੇ ਨਹੀਂ ਕਾਬੂ ਆਉਣਗੇ ਹੋਾ ਚ ਮੇਰੇ ਕਾਬੂ ਸੀ ਇਹ ਕਥਾਬ ਕਰੂਗੀ ਦੋਤੋਂ ਰੋਕ ਕਰ ਸਕਦਾ ਸੀ ਮਾਇਆ ਦੇ ਉਹਦਾ ਬੰਦ ਆਇਆ ਹੋਇਆ ਸੀ ਸਾਡੇ ਲੱਗਿਆ ਸੀ ਬੰਦ ਅਸਪਾਜਾ ਦਾ ਬੰਦ ਰੱਖਿਆ ਸੀ ਮਜਬੂਤ ਸੀ ਉਹਦਾ ਪਰਪਸ ਵਾਸਤੇ ਦੀ ਜਦ ਪਰਪਸ ਹੀ ਖਤਮ ਹੋ ਗਿਆ ਤੁਹਾਡੇ ਲਈ ਜੀ ਗਾਂ ਦਾ ਪਰਪਸ ਨਹੀਂ ਹੈ ਹਾਂ ਗਾਂ ਦਾ ਪਰਪਸ ਕੋਈ ਹਾਂ